ਅਜੇ ਸੀ ਸੰਤ ਅਜੰਤ ਸਿੰਘ ਜੀ ਉਹਨਾਂ ਦੇ ਨਾਲ ਅਸੀਂ ਸੰਦਰਸ਼ਨ ਸਿੰਘ ਜੀ ਉਹਨਾਂ ਦੇ ਜਿਹੜੇ ਵੱਡੇ ਭਾਈ ਸਨ ਉਹਨਾਂ ਦੀ ਯਾਦ ਵਿੱਚ ਇਹ ਸੰਗੀਤ ਸਮੇਲਨਾ ਚੀ ਕੀਰਤਨ ਸਿਮੇਰਨ ਸੰਗੀਤ ਸਮੇਲਨ ਅਸੀਂ ਕਰ ਰਹੇ ਹਾਂ ਸੰਤ ਖਜਾਨ ਸਿੰਘ ਔਰ ਦਰਸ਼ਨ ਸਿੰਘ ਦੀ ਜੋੜੀ ਜੋ ਕਿ ਜਿਹੜਾ ਵੀ ਉਹਨਾਂ ਨੂੰ ਇੱਕ ਵਾਰੀ ਸੁਣ ਲੈਂਦਾ ਸੀ ਉਹਨਾਂ ਦਾ ਕੀਰਤਨ ਅਸੀਂ ਤੇ ਸਭ ਨੇ ਸੁਣਿਆ ਹੋਇਆ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਲੈ ਕੇ ਔਰ ਇਹਨਾਂ ਸੱਚੇ ਬਾਹਰ ਸਤਿਗੁਰ ਜਗਜੀਤ ਸਿੰਘ ਜੀ ਦੇ ਨਾਲ ਉਹਨਾਂ ਨੇ ਬਹੁਤ ਦੇਰ ਆਪਣੀ ਕੀਰਤਨ ਦੀ ਸੇਵਾ ਨਿਭਾਈ ਹੈ ਔਰ ਜਿਹੜਾ ਵੀ ਇੱਕ ਵਾਰੀ ਉਹਨਾਂ ਨੂੰ ਸੁਣ ਲੈਂਦਾ ਸੀ ਉਹਨਾਂ ਨੂੰ ਭੁੱਲ ਨਹੀਂ ਸਕਿਆ ਉਹ ਮੁੜ ਕੇ ਸੰਤ ਖਜਾਨ ਸਿੰਘ ਦਾ ਤਬਲਾ ਐਸਾ ਸੀ ਉਹੀ ਬੋਲ ਔਰੋਜ ਵਜਾਉਂਦੇ ਸੀ ਪਰ ਇਦਾਂ ਲੱਗਦਾ ਸੀ ਜਿਵੇਂ ਹਰ ਵਕਤ ਉਹ ਨਵੀਂ ਚੀਜ਼ ਕੋਈ ਪੇਸ਼ ਕਰ ਰਹੇ ਨੇ ਔਰ ਨਾਲ ਉਹਨਾਂ ਨੇ ਆਪਣੀ ਘੁੰਗਰੂ ਵਜਾਣੇ ਔਰ ਲੱਗਦਾ ਸੀ ਕੋਈ ਨਾਲ ਜਿਵੇਂ ਕੋਈ ਅਪਸਰਾਂ ਨਚਣ ਲੱਗ ਪੈਂਦੀ ਏ ਇਸ ਤਰ੍ਹਾਂ ਦਾ ਉਹਨਾਂ ਦਾ ਤਬਲਾ ਸੀ ਮੈਨੂੰ ਯਾਦ ਏ ਕਿ ਬੰਬਈ ਸੰਗੀਤ ਸਮੇਲਨ ਹੋਇਆ ਸੀ ਸਚਿਬਾਈ ਹੁਕਮਕੀਤਾ ਕੇ ਤੁਸੀਂ ਵੀ ਇੱਕ ਸ਼ਬਦ ਹੈ ਤੇ ਕਲਾਸੀਕਲ ਸਦਗੋ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਅਸੀਂ ਸੰਗੀਤ ਸਮੇਲਨ ਉੱਥੇ ਕਰਦੇ ਸੀ ਬਹੁਤ ਹੋਏ ਨੇ ਹਰ ਸ਼ਹਿਰ ਵਿੱਚ ਬੰਬਈ ਲਖਨਊ ਦਿੱਲੀ ਪਰ ਬੰਬਈ ਜਦੋਂ ਸੰਗੀਤ ਸਮੇਲਨ ਸੀ ਸਚਿਬਾਈ ਹੁਕਮਕੀਤਾ ਖਜਾਨ ਸਿੰਘ ਰਾਣੂ ਨਾਲ ਉਹਨਾਂ ਦੇ ਕੁਲਾਉਣਾ ਦਾ ਸੰਦਰਸ਼ਨ ਸਿੰਘ ਰਾਂ ਦਾ ਸਾਬ ਜਾਇਦਾ ਉਸ ਹੀ ਨਾਲ ਦੋਵਾਂ ਨੇ ਜਦੋਂ ਸ਼ਬਦ ਪੜਿਆ ਉੱਥੇ ਸਟੇਜ ਤੇ ਇਹਨਾਂ ਨੇ ਬਾਅਦ ਵਿੱਚ ਆਪਣੀਆਂ ਤਬਲੇ ਦੇ ਨਾਲ ਘੁੰਗਰੀਆਂ ਵਜਾਈਆਂ ਤਾਂ ਲੋਕ ਉੱਠ ਕੇ ਵੇਖਣ ਲੱਗ ਪਏ ਵੀ ਇਹ ਪਤਾ ਨਹੀਂ ਡਾਂਸ ਕਿਵੇਂ ਨਾਲ ਹੋਣ ਲੱਗ ਪਿਆ ਦਿੱਸਦਾ ਤਾਂ ਕੋਈ ਹੈ ਨਹੀਂ ਨੱਚਦਾ ਪਰ ਐਸਾ ਉਹ ਤਬਲਾ ਵਜਾਂਦੇ ਸੀ ਔਰ ਐਸਾ ਉਹਨਾਂ ਦੇ ਹੱਥ ਵਿੱਚ ਇੱਕ ਜਾਦੂ ਸੀ ਸਮਝ ਲਓ ਜੋ ਵੀ ਸੁੰਦਾ ਸੀ ਉਹਨਾਂ ਦਾ ਤਬਲਾ ਉਹ ਕੀਲਿਆ ਜਾਂਦਾ ਸੀ ਇਹਦੇ ਨਾਲ ਨਾਲ ਗੌਂ ਤੇ ਵੀ ਉਹਨ ਦਾ ਪੂਰਾ ਅਧਿਕਾਰ ਸੀ ਨਾਲ ਗੌਂ ਵੀ ਇਸ ਤਰ੍ਹਾਂ ਸਨ ਅਸੀਂ ਛੋਟੇ ਹੁੰਦੇ ਮੈਨੂੰ ਯਾਦ ਹੈ ਪੈਣੀ ਸਾਹਿਬ ਤਲਾ ਦੇ ਕੰਢੇ ਅਸੂਂ ਦੇ ਮੇਲੇ ਤੇ ਸ਼ਾਮ ਦਾ ਕੀਰਤਨ ਸੀ ਤੇ ਸੰਤ ਖਜਾਨ ਸਿੰਘ ਰੀ ਤਬਲਾ ਵਜਾਂਦੇ ਵਜਾਂਦੇ ਨਾਲ ਉਹਨਾਂ ਨੇ ਉੱਤੇ ਸਾ ਰੀ ਕਰਕੇ ਲਾਇਆ ਉਹ ਐਸਾ ਸੁਰ ਵਿੱਚ ਔਰ ਐਸਾ ਉਹ ਸਾ ਜੰਮ ਕੇ ਲੱਗਾ ਕਿ ਲੱਗਦੀ ਸੀ ਚਾਰ ਚੁਫੇਰੇੋਂ ਉਸੇ ਦੀ ਆਵਾਜ਼ ਆ ਰਹੀ ਸੀ ਹੋਰ ਕੁਝ ਨਹੀਂ ਸੀ ਸੁੰਦਾ ਉਸੇ ਸਾਲਾਂ ਤੇ ਹੀ ਮੈਂ ਵੇਖਿਆ ਕਿੰਨੇ ਹੀ ਲੋਕ ਮਸਤਾਨੇ ਹੋਏ ਹੋਏ ਇੱਕ ਸੁਰ ਦੇ ਉੱਤੇ ਦੋ ਵਾਰੀ ਉਹਨਾਂ ਨੇ ਸੁਰ ਲਾਇਆ ਦੋਵੇਂ ਵਾਰੀ ਲੋਕ ਮਸਤ ਹੋ ਕੇ ਦੇ ਉਧਰ ਦੁਆ ਨਾਲ ਨੂੰ ਭੱਜਿਆ ਐ ਐਸੇ ਔਰ ਇੱਕ ਵਾਰੀ ਮੈਨੂੰ ਯਾਦ ਹੈ ਮਲੇਰਕੋਟਲੇ ਜਿਹੜਾ ਮੇਲਾ ਹੁੰਦਾ ਸ਼ਹੀਦਾਂ ਦਾ ਉੱਥੇ ਸੰਧਖਜਨ ਸਿੰਘ ਰਾਹ ਦਾ ਪਿੰਡ ਉੱਥੇ ਨੇੜੇ ਸ਼ਹਿਰ ਨੇੜੇ ਹੀ ਐ ਨਾ ਬਾ ਉਸ ਵੇਰੇ ਉੱਥੇ ਮੋਟਰਸਾਈਕਲ ਤੇ ਆਪਣੇ ਤੇ ਉਸ ਵੇਰੇ ਅਸਦੀ ਵਾਰ ਵਿੱਚ ਹੀ ਆਇਆ ਐ ਵਾਰ ਲੱਗੀ ਹੋਈ ਸੀ ਉਹਨਾਂ ਫਿਰ ਤਬਲਾ ਆਪਣਾ ਲਿਆ ਨਾਲ ਵਜਣ ਲੱਪੇ ਨਾਲ ਗਾਉਣ ਲੱਗ ਪਏ ਆਪਣੇ ਵੱਡੇ ਭਾਈ ਸਾਹਿਬ ਦੇ ਨਾਲ ਸੁੰਦਰਸ਼ਨ ਸਿੰਘ ਨਾਲ ਔਰ ਰਾਗ ਉਹ ਹੀ ਜੋਨਪੂਰੀ ਜਾਂ ਅਸ਼ਾਵਰੀ ਸਵੇਰੇ ਆ ਲਾਸਟ ਛੱਕਿਆਂ ਤੇ ਗਾਉਂਦੇ ਹਾਂ ਸੀ ਉਹਦੇ ਵਿੱਚ ਉਹ ਇੱਕ ਐਸਾ ਧਾਣੀ ਪਾ ਕਰਕੇ ਵੈਸੇ ਤੇ ਉਹ ਰਾਗ ਦੇ ਹਿਸਾਬ ਨਾਲ ਪਰ ਉਹ ਐਸੇ ਤਰੀਕੇ ਨਾਲ ਉਹ ਲਾਉਂਦੇ ਸੀ ਉਹ ਜਦੋਂ ਵੀ ਲਾਉਣ ਹਰ ਵਾਰੀ ਉਹਦਾ ਐਸਾ ਰਸ ਬਣਦਾ ਸੀ ਕਿ ਅੱਜ ਤੱਕ ਉਹ ਚੀਜ਼ ਪੁੱਲਦੀ ਨਹੀਂ ਔਰ ਐਸਾ ਸਾਡੇ ਉਥੇ ਜੀਵਨ ਨਗਰ ਇੱਕ ਬਾਬਾ ਬੱਲੀ ਹੁੰਦਾ ਸੀ ਉਹ ਉਹਨਾਂ ਦਾ ਬੜਾ ਆਸ਼ਕ ਸੀ ਗਾਣੇ ਦਾ ਉਹ ਜਦੋਂ ਕਰੀਏ ਨਾ ਸਾਵਰੀ ਗਾਉਣੀ ਤੇ ਉਹਨੇ ਕਹਿਣਾ ਵੀ ਇਹ ਖਜਾਨ ਸਿੰਘ ਦੇ ਨਾਲ ਤੇ ਨਾ ਸੱਜੇ ਪਾਸੇ ਰੱਬ ਖਲੋਤਾ ਹੁੰਦਾ ਜਦੋਂ ਉਹ ਗਾਉਂਦਾ ਹੁੰਦਾ ਇਦਾਂ ਦਾ ਉਹਨਾਂ ਦਾ ਗਾਣਾ ਵੀ ਸੀ ਨਾਲ ਔਰ ਨਾਲ ਉਹਨਾਂ ਦਾ ਤਬਲਾ ਤੇ ਕਿਆ ਬਾਤ ਸੀ ਉਹਨਾਂ ਨਾਲ ਗਾਣਾ ਵੀ ਉਹ ਐਸਾ ਚੜ ਕੇ ਗਾਉਂਦੇ ਸਨ ਕਿ ਜਵਾਬ ਹੀ ਨਹੀਂ ਸੀ ਉਹਨਾਂ ਦਾ ਸਿੱਧੇ ਸੁਰ ਲਾਣੇ ਸਪਸ਼ਟ ਔਰ ਉਹਨਾਂ ਦੀ ਕਿਆ ਬਾਤ ਹੈ ਹਾਜ਼ਰ ਜਵਾਬ ਐਸੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਗੱਲ ਕਰ ਲਓ ਉਹਨਾਂ ਦੇ ਚਾਰ ਚੁਫੇਰੇ ਜੁਰਮਤੀ ਵੀ ਆ ਰਿਹਾ ਹੁੰਦਾ ਸੀ ਉਹਨਾਂ ਦੇ ਨਾਲ ਗੱਲਾਂ ਕਰਨ ਵਾਲਿਆਂ ਦਾ ਉਹਨਾਂ ਦੇ ਬਚਨ ਸੁਣਨ ਵਾਲਿਆਂ ਦਾ ਔਰ ਖਾਸਸ ਕੇ ਉਹ ਆਪ ਵੀ ਹੱਸਦੇ ਹੰਤ ਨਾਲ ਦੂਸਰਿਆਂ ਨੂੰ ਵੀ ਸੰਦੇ ਸਨ ਕਦੀ ਵੀ ਉਹਨਾਂ ਨੂੰ ਅਸੀਂ ਨਿਰਾਸ਼ ਹੋਏ ਚਾਹ ਕਦੀ ਮੂੰਹ ਉਹਨਾਂ ਦਾ ਇਸ ਤਰ੍ਹਾਂ ਲਟਕਿਆ ਕਦੀ ਨਹੀਂ ਵੇਖਿਆ ਹਰ ਵਕਤ ਹੱਸੂ ਹੱਸੂ ਉਹਨਾਂ ਦਾ ਕਰਦਾ ਚਿਹਰਾ ਹੁੰਦਾ ਸੀ ਔਰ ਮਤਲਬ ਕਿਸੇ ਨਾਲ ਵੀ ਉਹਨਾਂ ਗੱਲ ਕਰਨੀ ਤੇ ਉਹ ਜਰੂਰ ਉਹਨੂੰ ਹਸਾ ਦਿੰਦੇ ਸੀ ਐਸੇ ਉਹਨਾਂ ਦੇ ਕਿਰਪਾ ਹੀ ਸੱਜੇ ਪਾ ਸ਼ਦੀ ਕਲਾਕਾਰ ਦੇ ਨਾਲ ਨਾਲ ਉਹ ਇਨਸਾਨ ਵੀ ਬੜੇ ਵਧੀਆ ਸੀ ਔਰ ਇੱਕ ਇਹਨਾਂ ਚ ਇੱਕ ਗੁਣ ਨਹੀਂ ਸੀ ਬਹੁਤ ਗੁਣ ਸੀ ਦਵਾਈਆਂ ਵੀ ਜਾਣਦੇ ਸੀ ਕੋਈ ਕਿਸੇ ਨੂੰ ਕੋਈ ਹੋਣੀ ਉਹਨੂੰ ਦਵਾਈ ਵੀ ਦੱਸਦੇ ਨੇ ਵੀ ਤੈਨੂੰ ਇਹ ਖਾ ਲੈ ਹੋਰ ਵੀ ਕਈਆਂ ਨੂੰ ਹੋਰ ਬੜੇ ਗੁਣ ਸਨ ਉਹਨਾਂ ਦੇ ਵਿੱਚ ਇੱਥੋਂ ਤੱਕ ਆਪਣਾ ਢੋਲ ਕੀ ਵਜਾਲਾ ਬੀਬੀਆਂ ਕਿਧਰੇ ਜਾਣਾ ਦੌਰੇ ਚ ਉਹਨਾਂ ਕਹਿੰਦੇ ਸਾਨੂੰ ਕੱਪੜੇ ਵੰਤਰਨੇ ਸਿਖਾ ਦਿਓ ਨਾਮਤਾਰੀ ਕਾਟਦੇ ਉਹ ਸੂਟ ਵੀ ਕੱਟ ਲੈਂਦੇ ਸਨ ਸਿਉਂ ਵੀ ਲੈਂਦੇ ਸੀ ਬਹੁਤ ਗੁਣੀ ਬੰਦੇ ਸੀ ਜਵਾਬ ਨਹੀਂ ਸੀ ਉਹਨਾਂ ਦਾ ਜਿੰਨੀ ਸਤਿਗੁਰਾਂ ਨੇ ਉਹਨਾਂ ਦੀ ਆਇਯੂ ਬਖਸ਼ੀ ਉਹ ਨਿਭਾ ਕੇ ਚਲੇ ਗਏ ਨੇ ਔਰ ਬਹੁਤ ਅੱਛੀ ਨਿਭਾਈ ਇਹਨੇ ਆਇਯੂ ਭਗਵਾਨ ਸੱਚੇ ਪਾਸ਼ਾ ਕਿਰਪਾ ਕਰਨ ਵੀ ਸਭ ਨੂੰ ਇਦਾਂ ਦੀ ਆਇਯੂ ਨਿਭਾਉਂਦਾ ਕਿਰਪਾ ਕਰਨ ਪਰ ਇਹ ਕਿਸੇ ਕਿਸੇ ਤੇ ਹੀ ਕਿਰਪਾ ਹੁੰਦੀ ਹੈ ਔਰ ਜੋੜੀਆਂ ਜਿਹੜੀਆਂ ਸਾਡੇ ਪੰਜਾਬੀ ਦਾ ਇੱਕ ਅਖਾਣ ਹੈ ਕਿ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ ਇਸ ਨਾਲ ਸੰਤ ਦਰਸ਼ਨ ਸਿੰਘ ਖਜਾਨ ਸਿੰਘ ਦੀ ਜੋੜੀ ਵਾਕਈ ਇੱਕੋ ਜਿਹੀ ਔਰ ਇਹ ਕਦੀ ਕਿ ਬਣ ਕੇ ਆਉਂਦੀ ਹੈ ਦੁਨੀਆ ਤੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਦੋ ਸ਼ਬਦ ਤੁਹਾਰੇ ਸਾਹਮਣੇ ਪੇਸ਼ ਕਰਦਾ ਅਸੀਂ ਉਦਾਂ ਦਾ ਨਹੀਂ ਗਾ ਸਕਦੇ ਪਰ ਜੋ ਵੀ ਟੁੱਟਾ ਫੁੱਟਾ ਕਬੂਲ ਕਰਨਾ